ਵਾਰ ਮਲਾਰ ਕੀ ਮੁਹੱਲਾ ਪਹਿਲਾ ਰਾਣੇ ਕੈਲਾਸ ਤਤਾ ਮਾਲਦੇ ਕੀ ਤੁਨੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮੁਹੱਲਾ ਤੀਜਾ ਗੁਰ ਮਿਲਿਆ ਮਨ ਰਹਿਸੀਐ ਜਿਉ ਉੱਠੈ ਤਰਣ ਸ਼ਿੰਗਾਰ ਸਭ ਦਿਸੈ ਹਰਿਆਵਲੀ ਸਭ ਭਰੇ ਸੁਭਰਤਾਲ ਜੇ ਗਿਆਨ ਬੰਝਵੇ ਅਸਲੀ ਗੁਰਮਤਿ ਆ ਉਹ ਜਿਹੜਾ ਹੈਗਾ ਚੰਬੇ ਚ ਹੋ ਜਾਂਦਾ ਚੰਬੇ ਚ ਉਹ ਆ ਗੱਲ ਹੈ ਅਸਲ ਗੱਲ ਇਹ ਹੈ ਕਿ ਆ ਤਾਂ ਗੱਲਾਂ ਫਿਰੇ ਤਾਂ ਗੁਰਮਤਿ ਹੈ ਬੇਬਾਰੇ ਸੀ ਉਹ ਤੇ ਸਭ ਕੁਝ ਬੜ ਲੀਊਗਾ ਕਿਉਂ ਗੁਰਤੈ ਤਾਲ ਨੂੰ ਸੁਨਾਰ ਜੇ ਮਿੱਟੀ ਜੀ ਤੇ ਬਦਲ ਜਾਂਦੀ ਹੈ ਨਿਕਦਮ ਉਹ ਤੇ ਬਹੁਤ ਹਰੀ ਭਰੀ ਹੋ ਜਾਂਦੀ ਹੈ ਉਹ ਖਰਾਪਰਾ ਹੋ ਜਾਂਦਾ ਕਿਉਂਕਿ ਪਹਿਲੇ ਜੋ ਗਨਮ ਤੁਹਾਨੂੰ ਕਰਦਾ ਉਹ ਸੁੱਕਾ ਰਿਹਾ ਉਹਨਾਂ ਰੁਗੜਿਆ ਰੱਖਦੀ ਹੁੰਦਾ ਉਤੋਂ ਪ੍ਰਾਪਤੀ ਕੁਝ ਹੋਈ ਉਹਦੀ ਹੁੰਦੀ ਹੈ ਇਹ ਸੁੱਕੇ ਕਾਸਟ ਹਰਿਆ ਹੋ ਗਿਆ ਗੁਰਦਿਲ ਕੇ ਜਿਵੇਂ ਧਰਤੀ ਸੁੱਕੀ ਮੀਂਹ ਪਏ ਤੇ ਹਰੀ ਭਰੀ ਹੋ ਜਾਂਦੀ ਇਹ ਹੋ ਗਿਆ ਰੱਖ ਕਬਤੂਦ ਸਾਰੀ ਆਬਲੀ ਸਾਡੀ ਧਰਤੀ ਚਾਰੇ ਤਰਫ ਹਰੀਆਬਲੀ ਪੀਦੀ ਹੈ ਜੇ ਦੁਨੀਆ ਜਿੱਤੀ ਦੁਨੀਆ ਦਾ ਕੱਲ ਦੇ ਵਿੱਚ ਵੀ ਗੱਲ ਗੁਰੂ ਦੀ ਪੈਜੂਗੀ ਸਭ ਹਰੇ ਭਰੇ ਹਿਲਦੇ ਹੋ ਜਾਣਗੇ ਸਭ ਭਰੇ ਜ਼ੁਪਰ ਤਾਲ ਜਿੱਦੇ ਜਿੱਦੇ ਗਿਆਨ ਦੀ ਲੋੜੂ ਤਾਲ ਸਭਨੇ ਪਰ ਚੱਲਗੇ ਧਰਤੀ ਤੇ ਵੀ ਛਪੜੀ ਜਾਂ ਪੈਂਦਾ ਵੀ ਜਿੱਲੇ ਜਿੱਲੇ ਕਾਲ ਛੋਟੇ ਮੋਟੇ ਸਭ ਭਰੇ ਪਏ ਹੋਤੇ ਜਿਵੇਂ ਐ ਹਿਰਦੇ ਸਾਰੇ ਉਹਦੇ ਪਰ ਚੱਲਗੇ ਜਿੱਦੀ ਕਿਸੇ ਨੂੰ ਭੁੱਖ ਹੋਵੇ ਇੱਛਾ ਹੋਦੀ ਉਹ ਵੜਜੂ ਜਿੱਦੀ ਕਿਸੇ ਨੂੰ ਗਿਆਨ ਦੀ ਹੋ ਨੀ ਉਹ ਫੁੱਲ ਹੋਜੂ ਅਜ ਜਦ ਬੋਲ ਬੋਲਦਾ ਸਹੀ ਗਿਆਨ ਪ੍ਰਗਟ ਹੋ ਜਦ ਸਹੀ ਗਿਆਨ ਦਾ ਪ੍ਰਚਾਰ ਹੋ ਸਾਰੇ ਦੇ ਹਿਰਦੇ ਤ੍ਰਿਪਤ ਹੋ ਜੰਮੇ ਜਿੰਨਾ ਕਦੋਂ ਗਿਆਨ ਚਾਹੀਦਾ ਉਹਨਾਂ ਲੈ ਲੋ ਜਿੱਦਾਂ ਕਦਾ ਪੜਦਾ ਉਡਾ ਹੀ ਪੜ ਲੋ ਜਿੰਨਾ ਵਰਸੀ ਪੜਦਾ ਬਟਾ ਉਹੀ ਪੜ ਲੋ ਹਾਂਜੀ ਅੰਦਰ ਰੱਚ ਸੱਚ ਰੰਗ ਜਿਉ ਮਜੀਠੇ ਜਦ ਤਾਲ ਭਰ ਕੇ ਰੋਬ ਦੇ ਨਾਲ ਦਰਦਾ ਭਰ ਗਿਆ ਸੱਤ ਰੰਗਾਂ ਸਾਚ ਰੰਗ ਸੱਤ ਰੰਗਾਂ ਦੇ ਚੜਦੇ ਅੰਦਰ ਪਹਿਲਾਂ ਝੂੜਤਾ ਰੰਗ ਚੜਿਆ ਆਇਆ ਸੀ ਰੰਗ ਦਾ ਰੰਗ ਅੰਦਰ ਚੜਨ ਲੱਗਿਆ ਨਾ ਅਸਰ ਹੋਣ ਲੱਗਿਆ ਰੋਬ ਅਸਰ ਹੋਣ ਲੱਗਿਆ ਰੋਬ ਦਾ ਸਾਚ ਰੰਗ ਅਸਰ ਰੰਗ ਜਿਉਂ ਬਜੀਠਾ ਲਾਲ ਪੱਕਾ ਰੰਗ ਰੋਬ ਲਾਲ ਬਜੀਠਾ ਰੰਗ ਰੋਬ ਲਾਲ ਦਾ ਐ ਜਾ ਰੰਗ ਚੜ ਗਿਆਂ ਜਿਹੜਾ ਨਾ ਕਦੇ ਠਿੱਕਾ ਹੋ ਕਰ ਸਕੇ ਕੋਈ ਇਹਨੂੰ ਤਾਂ ਬੈੜਾ ਹੋਵੇ ਨਾ ਦਾਗ ਲਗੇ ਕੋਈ ਦੁਨੀਆਂ ਦੀ ਇਹਨੂੰ ਤੇ ਕੋਈ ਕਲਾਕਸ਼ ਕਰਕੇ ਇਹਨੂੰ ਕੋਈ ਪਰਮਾਹ ਦੀ ਸੰਗਦੀ ਹੁਣ ਇਹਨੂੰ ਝੂਠਾਲੀ ਸਾਬਤ ਕਰ ਸਕਦੀ ਇਹਨੂੰ ਪਰਮਚੈ ਦੀ ਕਾ ਸਕਦੀ ਹ ਜਦ ਗੱਲ ਸੁਣ ਲਈ ਚਖਦੇ ਪਰਮਿਆਂ ਦੀ ਤਾਂ ਜਣ ਪਰਮਿਆਂ ਦੀਆਂ ਅੰਧ ਰੰਗ ਲਾਤਾ ਦੋਬਤਾਰਾਂ ਵਿਚੜਾ ਹਾਂਜੀ ਕਮਲ ਵਿਕਸੈ ਸਚ ਮਨੀ ਗੁਰ ਸ਼ਬਦ ਨਿਹਾਲ ਪਰ ਜੀ ਦਾ ਕਮਲ ਖਿਲ ਗਿਆ ਪਰ ਗਿਆ ਖੁਸ਼ੀ ਹੋ ਗਈ ਜਦ ਖਿੰਦਾ ਜਦੋਂ ਜੋ ਕੁਝ ਭੜਦਾ ਉਹਦੇ ਮਿਲ ਜਾਂਦਾ ਜੋ ਚਾਹੁੰਦਾ ਸੀ ਉਹਨੂੰ ਮਿਲ ਗਿਆ ਕਮਲ ਖਿਲ ਗਿਆ ਕਮਲ ਖਿੰਦਾ ਜਦ ਜਿੰਨਾ ਰਸ ਉਹਨੂੰ ਖਿਲਣ ਵਾਸਤੇ ਚਾਹੀਦਾ ਮਿਲ ਜਾਂਦਾ ਕਮਲ ਸੱਚ ਬੁਲੀ ਸੱਚ ਬੁਲੀ ਜਿਹਨਾਂ ਦੇ ਬਨਾ ਵਿੱਚ ਸੱਚ ਹੈ ਉੱਥੇ ਉਹਨਾਂ ਦੇ ਕਰਦੋ ਲਖੜ ਜਾਂਦੇ ਨੇ ਗੁਰਕਾਏ ਸ਼ਬਦ ਦੇ ਹਾਲ ਆ ਗੁਰਕਾ ਸ਼ਬਦ ਜੇ ਤਾਂ ਦੇ ਹਾਲ ਕਰ ਦਿੰਦਾ ਨਾ ਆਗੋ ਬਾਗ ਹੋ ਜਾਂਦਾ ਨੇ ਗੁਰੂ ਦੇ ਨਾਲ ਅਕਾ ਤੋਂ ਲਖੜ ਜਾਂਦਾ ਉਹਨਾਂ ਵਿੱਚ ਸੱਚ ਪਹਿਲਾਂ ਹੀ ਹੁੰਦਾ ਹੈ ਦੇ ਹਾਲ ਹੋ ਜਾਂਦੇ ਹੈ ਉਹ ਵਸਤਾ ਹੈ ਜਿੱਤੇ ਉੱਪਰ ਵੀ ਹੋਰ ਕੋਈ ਖੁਸ਼ੀ ਦੀ ਅਵਸਤਾ ਹੈ ਨਹੀਂ ਹਾਂਜੀ ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਥੇ ਮਿਰਗ ਜਿਉ ਸਿਰ ਦੀਸੈ ਜਮਕਾਲ ਜਿੰਤੇ ਗੁਰਮਖ ਖੁੱਦ ਨੇ ਲੈ ਕੇ ਬੰਦੂਖੀ ਉਤਾਰੇ ਬੰਦੂਖੀ ਨਾਲ ਹਰ ਗਾਦੀਓ ਬੇਟੀ ਬਬੜੀ ਹੋ ਗਿਰ ਬਲਮੁਖ ਦੂਜੀ ਤਰਫਾ ਗੁਰਮਖ ਵਿਰੋਧ ਤੇ ਖੜਾ ਮਰਮਦ ਦੇ ਤੇ ਕਈ ਟੀਮ ਲ ਬਣ ਗਿਆ ਦਲਮੁਖ ਬਣਾ ਕੇ ਰੱਖੀ ਅਦੇ ਪਹਿਲ ਸ੍ਰੀ ਚੰਦਰ ਦੀ ਟੀਮ ਬਣਾਈ ਜੋਗੀ ਬਣੇ ਫਿਰ ਰਾਜੇ ਬਣ ਕੱਟਾ ਤਾਤੂ ਦਾਸ ਉਹਦੀ ਬਣੇ पर ये मेहरबान पंडित बनते ही रहे पर पग में बादशाह के भा भी बन गए सारे बनते रहे पर गुरु पर अपनी गल करदा रहा सारे ही फेल हो गए सारे ही नहीं रोक सके रोब नहीं सके पंचवी कर नहीं सके झूठे नहीं कर लो झूठे थे सारे रोकण लगे तो दुबे के गदल पा दिए सही पै सके ਔਰ ਦੂਜੀ ਤਰਫੇ ਬੰਦਬੁਖ ਗੁਰਮੁਖ ਦੇ ਵਿਰੋਧ ਖੜੇ ਰਹੇ ਨੇ ਅਰਥੋ ਦੇ ਅੰਤ ਕਰਦੇ ਨੇ। ਆ ਮਨ ਮੁਖਾਂ ਦਾ ਹੀ ਪ੍ਰਚਾਰ ਹੈ ਜਿਹੜਾ ਹੋ ਰਿਹਾ ਅੱਜ ਸਾਡੇ ਕੋਲ। ਕੀ ਕਹਿੰਦਾ ਪ੍ਰਚਾਰ ਵੀ ਬੰਦਬੁਖਾਂ ਦਾ ਕੀਤਾ ਹੈ। ਬੰਦਬੁਖੇ ਕਰਦੇ ਰਹੇ ਨੇ ਤੇ ਗੁਰਮੁਖ ਤਾਂ ਫੁੱਡੇ ਲੈਣ ਲੱਗੇ ਰਹੇ ਨੇ ਅੱਡ ਉਹਨੂੰ ਵੀ ਪ੍ਰਚਾਰ ਨਹੀਂ ਕੀਤਾ। ਚਿੱਕੀ ਤਾਂ ਸਾਡੇ ਕੋਲ ਕਰਤੀ ਸੀ 80 ਰੁਪਏ ਗੁਰਦਾਰ ਕੇ ਚਿੱਕੀ ਦਾ ਉਹਦਾ ਵੀ ਖਤਮ ਕਰਤੀ ਸੀ। ਆਹ ਦਾ ਪ੍ਰਚਾਰ ਇਹਦਾ ਵੀਡੀਓ ਦਾ ਪ੍ਰਚਾਰ ਹੈ। ਜਿਹੜਾ ਸਾਡੇ ਕੋਲ ਠੀਕ ਹੈ ਜਿਹਦਾ ਨੇ ਬੀੜੇ ਤੇ ਰਲ ਮਿਲ ਕੇ ਪੜਤੋਲ ਦੇ ਲਖਾਇਆ ਹਾਂਜੀ ਮਨਮੁਖ ਦੂਜੀ ਤਰਫ ਹੈ ਵੇਖੋ ਨਜ਼ਰ ਨੇ ਹਾਲ ਦੇਖੋ ਐਸ ਵਾਰ ਤੁਸੀਂ ਜਿਹੜੇ ਦੂਜੀ ਤਰਫ ਸੱਚ ਪ੍ਰਗਟਾ ਬੰਦਲ ਨੂੰ ਤਿਆਲਦੀ ਜਿਹੜੇ ਮੰਡਲ ਨੂੰ ਤਿਆਲਦੀ ਮਨਮੁਖ ਨੇ ਹੋਸੇ ਤੁਹਾਡੇ ਦੇ ਬੰਦੇ ਨੇ ਹੋ ਵੀਰ ਮੇ ਕੱਢ ਦੇ ਕੋਈ ਤਰੀਕਾ ਵਰਤਦੇ ਸਾਡੀ ਕੋਈ ਪੈਨ ਤਰ੍ਹਾਂ ਵਰਤਦੇ ਸਾਡੇ ਕੋਈ ਪੈਨ ਤਰ੍ਹਾਂ ਬਦਲ ਲੈ ਸਾਡਾ ਬਚਾਅ ਹੋ ਜਾਵੇ ਉਹ ਪ੍ਰਸਿੱਧ ਜੂਮ ਵਾਲੀ ਬੈਠੇ ਹੋ ਵਾਲ ਸੱਚੀ ਹੈ ਦੀ ਹੈ ਸਾਡੀ ਹੈ ਦੀ ਇਹ ਤਾਂ ਸਾਬਤ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਤੇ ਤੁਸੀਂ ਦੂਜੀ ਤਰਫ ਵਾਲੇ ਤੁਸੀਂ ਕਹਿ ਰਹੀ ਹੈ ਉਹ ਦੂਜੀ ਤਰਫ ਕੋਈ ਬੋਲਦਾ ਹੀ ਨਹੀਂ ਬੋਲਦੇ ਹੋ ਦੂਜੀ ਤਰਫ ਕੌਣ ਹੈ ਜੋ ਬੋਲ ਰਿਹਾ ਦੂਜੀ ਤਰਫ ਹੋਈ ਦੂਜੀ ਤਰਫ ਚੁੱਪ ਕਰਿਆ ਦੂਜੀ ਤਰਫ ਕਿੱਥੇ ਹੋ ਕਹਣ ਵਾਲਿਆਂ ਦੀ ਦੂਜੀ ਤਰਫ ਸਤਿਰੇ ਦੂਜੀ ਤਰਫ ਹੇ ਅਗਨਰ ਬਿਸ਼ਰੀਆ ਦੂਜੀ ਤੇ ਵੋਦੂਜੀ ਦਾ ਖੌਲਦੇ ਹਾਂ ਜੀ ਫਾਇਜ ਫਾਤੇ ਮਿਰਗ ਜਿਉ ਸਿਰ ਦੀਸਾ ਜੰਪਾਲ ਫਾਇਜ ਸਰਪਤੇ ਆਇਆ ਜਿੱਦੇ ਦਾ ਫਸਿਆ ਹੁੰਦਾ ਜਿਹੜੇ ਵਿਰੋਧ ਚ ਖੜੇ ਨੇ ਇਹਨਾਂ ਦਾ ਹੀ ਫਾਇਜ ਸਰਪਤੇ ਸਭ ਦਾ ਸਾਡਾ ਆਇਆ ਫਾਇਜ ਫਾਤੇ ਮਿਰਗ ਜਿਉ ਸਿਰ ਦੀਸਾ ਜੰਪਾਲ ਉਹ ਹਣ ਫਸ ਕੇ ਸੱਚ ਆ ਗਿਆ ਛੱਟ ਦੀ ਫਾਈਚ ਫਸ ਗਏ ਜੇ ਬਦਲਦੇ ਦੇ ਥਾਲ ਵਰਦੇ ਨੇ ਨਹੀਂ ਬਦਲਦੇ ਥਾਲ ਵਰਦੇ ਨੇ ਛੱਕ ਨੇ ਫਸਾਲੇ ਫਾਹੀ ਚ ਇਹ ਬਰੌਦੇ ਦੇ ਪਰਬਜ਼ਾਰ ਚ ਲੋਕਾਂ ਨੂੰ ਫਸਾਏ ਹੋਏ ਤੇ ਛੱਟ ਦੀ ਫਾਈਚ ਫੁੱਟ ਫਸੇ ਡੱਕੇ ਹੁਣ ਆਏ ਨੇ ਸੱਤੇ ਜੰਮਕਾਲ ਛੱਟ ਨੂੰ ਨਾ ਬਨਣ ਦੇ ਥਾਲ ਵਰ ਗਿਆ ਬਨਣ ਦੇ ਥਾਲ ਵਰ ਜਾਂਦੀ ਦੋ ਹੀ ਪਾਸੇ ਪਊਗਾ ਹਾਂਜੀ ਖੁੱਦਿਆ ਤ੍ਰਿਸ਼ਨਾ ਨਿੰਦਾ ਬੁਰੀ काम क्रोध विकराल इनी अखी नजर ना आवेई जिचर शब्द न करे विचार खुदया कृष्ण दत्तापुरी ओखाई जड़ी खुदया कृष्ण गोर-गोर तण इकट्ठा करदी देत्या करदी खोट कर काढणी अ गुरबानी सही हाथਾਂ भी खोट काढणी साहेब कबे बनाता साहेब कबते तुसी साहेब कबे बनाया दसो ਇੱਤਾ ਕਾਮ ਕ੍ਰੋਧ ਬਿਕਰਾਲ ਕਾਮ ਔਰ ਕ੍ਰੋਧ ਦਾ ਤਾਂ ਬਿਕਰਾਲ ਭਿਆਨਕ ਰੂਪ ਹੁੰਦਾ ਇੱਥੇ ਹੱਦ ਤੱਕ ਜ਼ੁਲਮ ਕਰ ਦਿੰਦਾ ਹੈ ਘਰ ਵਿੱਚ ਜ਼ੁਲਮ ਕਰਦਾ ਹੈ ਰੂਪ ਧਾਰਨ ਕਰਕੇ ਤਰਗੂ ਅਰਬਨੀ ਕਰਦਾ ਵਰਤ ਜ਼ਲਬੂ ਕਰ ਦਿੱਤੇ ਆਕੇ ਅਸਲੀ ਤਰਦਕੇ ਬਲੱਡੀ ਮੈਰੀ ਨੇ ਕੀਤਾ ਉਹਨੂੰ ਜ਼ਲਬੂ ਤੇ ਕਰਦੇ ਹੀ ਰਹੇ ਅੱਖਾਂ ਨਾਲ ਦੇਖਣ ਵਾਲੀ ਇਹਨਾਂ ਲਈ ਤਾਂ ਕੁਝ ਵੀ ਦੀਦਾ ਹੈ ਨਗਰ ਨਾਲ ਗਈ ਜਿੱਕਰ ਸ਼ਬਦ ਨਾਲ ਕਰੇ ਵਿਚਾਰ ਬਾ ਗੁਰਬਾਣੀ ਦੇ ਵਿਚਾਰ ਚੋਂ ਪਤਾ ਲੱਗਦਾ ਹੈ ਗੱਲ ਕੀ ਹੈ ਅੱਖਾਂ ਨਾਲ ਕੀ ਦੇ ਅੱਖਾਂ ਨਾਲ ਮూర్ਤੀਆਂ ਮੋੜੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਮਾਇਆ ਮਾਇਆ ਤੱਕ ਐਸੀ ਬੁਤ ਮਾਇਆ ਤੋਂ ਕੈਦੀ ਦੀਦਾ ਸੁਖਾਲ ਤੋਂ ਅਗਦੇ ਦੀ ਹੈ ਅੱਖਾਂ ਮਾਇਆ ਤੱਕ ਦੀ ਬਤਲੇ ਜਿੱਕਰ ਸ਼ਬਦ ਕਰੇ ਵਿਚਾਰ ਸ਼ਬਦ ਵੀ ਅੱਖਰ ਤੋਂ ਭਰੇ ਦੀ ਗੱਲ ਹੈ ਸ਼ਬਦ ਕਰਨ ਦਾ ਵਿਸ਼ਾ ਹੈ ਵਿਚਾਰ ਕਰਨ ਦੀ ਇਹ ਬੁੱਧੀ ਨਾਲ ਜਿਹੜਾ ਸ਼ਬਦ ਗੁਰੂ ਅਸੀਂ ਕਹਿੰਦੇ ਆ ਤੰਨਾ ਦਾ ਵਿਸ਼ਾ ਹੈ ਸ਼ਬਦ ਹੁੰਦਾ ਹੀ ਕਰਨ ਦਾ ਵਿਸ਼ਾ ਬਾਣੀ ਹੁੰਦੀ ਉਹ ਕਰਨ ਦਾ ਵਿਸ਼ਾ ਅੱਖਰ ਅੱਖਰ ਦਾ ਵਿਸ਼ਾ ਵਿਚਾਰ ਬੁੱਧੀ ਦਾ ਵਿਸ਼ਾ ਅੱਖਰ ਤਾਂ ਖੁੱਡਾ ਵਿਸ਼ਾ ਖਾਣਾ ਜੋਤੀ ਦੀ ਹੈ ਉਹ ਗੁਰੂ ਨਹੀਂ ਹੋ ਸਕਦੀ ਬਾਣੀ ਗੁਰੂ ਹੈ ਸ਼ਬਦ ਗੁਰੂ ਹੈ ਸ਼ਬਦ ਕਰਨ ਦਾ ਵਿਸ਼ਾ ਅੱਖਰ ਹੁੰਦਾ ਹੈ ਅੱਖਰ ਨੂੰ ਦੇਖਣ ਵਾਲਾ ਗੁਰੂ ਹੁੰਦਾ ਹੀ ਨਹੀਂ ਜਿਹੜਾ ਅੱਖਾਂ ਦੂਦਰ ਵਾਲਾ ਗੁਰੂ ਕਿਤੇ ਬਣੀ ਨਹੀਂ ਹੋਇਆ ਗੁਰਬਾਣੀ ਉਹ ਤਾਂ ਬਾਂਬ ਲਗਾਦਾ ਸੀ ਬਾਰੇ ਗੁਰੂ ਉਹ ਜੰਤਕਾਰ ਗੁਰਅਰਥ ਕਹਿੰਦਾ ਨਾਲੇ ਉਹਨੇ ਰਹਿਣਾ ਸੀ ਸਰੀਰ ਦਾਸਵੰਤ ਹੈ ਦਾਸਵੰਤ ਗੁਰੂ ਨਹੀਂ ਉਦਕਦੇ ਸਰੀਰ ਦਾਸਵੰਤ ਹੈ ਜੋ ਚੀਜ਼ ਨਾਸਵੰਤ ਹੈ ਗੁਰੂ ਨਹੀਂ ਕਹਿ ਸਕਦੇ ਉਹਨੂੰ ਇਹਨਾਂ ਅੱਖਾਂ ਨਾਲ ਦੇਖਣ ਵਾਲਾ ਹੋ ਕੁਝ ਵੀ ਉਹ ਸ਼ਬਦ ਵਿਚਾਰ ਕਰਨਾ ਜਿੰਨਾ ਕਿ ਸ਼ਬਦ ਵਿਚਾਰ ਨਹੀਂ ਕਰਨਾ ਕਿ ਸੁਭ ਜਲੀ ਹੋਣੀ ਇਹ ਵਿਸ਼ਾ ਸਮਝਦਾ ਆਖਾ ਅਸਰ ਦੀ ਬੁੱਧੀ ਅਕਲ ਆਖਾ ਅਕਲ ਨੂੰ ਸੁਭ ਚ ਆ ਗਿਆ ਜਿਹੜਾ ਉਹਨੂੰ ਦੇਖਿਆ ਬਸ ਠੀਕ ਹੈ ਇਹ ਦੱਸਣ ਵਿਚਾਰ ਤੋਂ ਬਿਨਾਂ ਸਮਝ ਨਹੀਂ ਆਉਂਦਾ ਵਿਚਾਰ ਤੋਂ ਬਿਨਾਂ ਕਦੀ ਸਮਝ ਆਊਗਾ ਠੀਕ ਹੈ ਜੇ ਸਮਝ ਆਊਗਾ ਹੋ ਸਕਦਾ ਗੱਲ ਸਮਝ ਆ ਜਾਵੇ ਹਰ ਦੂਜਾ ਵੀ ਚਾਹ ਰਿਹਾ ਕੰਟਰੋਵਰਸੀ ਦੇਖੜੀ ਗਾਂ ਵਰ ਬਾਣੀ ਪਈ ਹੈ ਕੁਰਬਾਨੀ ਵੀ ਤਾਂ ਇਹ ਹੈ ਜੇ ਗਲਤ ਆਊਗਾ ਹਾਂ ਜਾ ਕੇ ਅੰਟਰਵਿਊਤੀ ਆਜੂਗੀ ਪਤਾ ਲੱਗ ਜੂਗਾ ਵੀ ਉੱਥੇ ਅਸੀਂ ਕੀ ਸਮਝਾਏ ਐ ਹੋਰ ਕਿਹਾ ਹੋਇਆ ਹੈ ਕਿ ਕੋਲ ਅੰਦਰ ਲੈ ਕੇ ਲਾਈਨ ਨੂੰ ਬਿਕੇ ਨਹੀਂ ਕਰ ਸਕਦੇ ਆਲ ਜੰਜਾਲ ਮੂਲ ਰਹੈ ਗੁਰਸੇਵੀਐ ਗੁਰਪੌੜੀ ਬੋਹਿਤ ਤਦ ਭਾਵੈ ਸੰਤੋਖੀਆਂ ਜੇ ਤੁਦ ਤੋਖੀਆ ਜੋ ਤੈਨੂੰ ਕਹਦੇ ਤਦਲਾ ਤੁਦ ਹੈ ਤੁਦ ਭਾਵੈ ਸੁਤੋਖੀਆ ਚੁੱਕੇ ਹਾਲ ਜਿਹਾ ਅਸਾਰਾ ਹਾਲ ਜਿਹਾ ਵਾਲਾ ਸਾਡਾ ਜਿਹੜਾ ਮੇਰੇ ਗੱਲ ਪਿਆ ਹੋਇਆ ਇਹ ਸਾਰੇ ਝੁੱਕ ਜਿਓ ਜੇ ਤੂੰ ਇਹਦੇ ਪਾਸ ਠੀਕ ਹੈ ਇਹਨਾਂ ਨੇ ਬਿੰਦੀ ਲਾਈ ਹੋਈ ਹੈ ਇੱਥੇ ਤੁਦ ਭਾਵੈ ਸੰਤੋਖੀਆ ਚੁੱਕ ਆਲ ਜੰਜਾਲ ਮੂਲ ਰਹਿ ਗੁਰਸੇਵੀਐ ਗੁਰ ਪੌੜੀ ਬੂਹਿਤ ਬੂਲ ਰਹਿ ਜਿਹੜਾ ਬੂਲ ਲੈ ਕੇ ਆਇਆ ਸੀ ਉਹ ਤਾਂ ਕਿਤੇ ਚਲਦਾ ਨਹੀਂ ਵਿੱਚ ਇਸ ਘਾਟਾ ਪੈ ਨਹੀਂ ਸਕਦਾ ਰਹਿ ਗੁਰਸੇਵੀਐ ਬੂਲ ਲੱਦੇ ਰਹਿੰਦੇ ਜਿਨਾ ਚਿਰ ਬੂਲ ਘੋਇਆ ਨਹੀਂ ਗੁਰ ਦੀ ਸੇਵਾ ਕਰਨ ਲੱਗ ਜਾਓ ਹੋਰ ਪਰਵਾਣੀ ਵਿਚਾਰ ਕਰਨ ਲੱਗ ਜਾਓ ਬੂਲ ਜਵਾਦਾ ਕਰ ਲੱਗ ਜਾਓ ਬੂਲ ਰਹਾ ਗੁਰਸੇਵੀਐ ਗੋਲ ਪੌੜੀ ਬੋਇਂ ਪਰ ਗੋਲ ਪੌੜੀ ਬਣ ਜਾਂਦਾ ਏ ਗਿਆਨ ਦੀ ਪੌੜੀ ਨਾ ਬਹੁਤ ਤਕਬਲ ਜੀ ਦਾ ਹੱਥ ਤੱਕ ਪਹੁੰਚਣ ਪਾਵੇ ਹਾਂਜੀ ਪੌੜੀ ਲਾ ਕੇ ਜਹਾਜ ਛੱਡ ਜਾਓ ਨੌਬ ਜਹਾਜ ਦੇ ਵਿੱਚ ਵੜ ਜਾਓ ਤੇ ਦੇ ਵਿੱਚ ਅੱਛਾ ਇਹਦੇ ਭਾਵ ਤਾਂ ਜਿਹੜਾ ਆਪਣਾ ਮੂਲ ਹੈ ਉਹ ਦੀ ਹੋਂਦ ਤਾਂ ਹੈ ਜਦੋਂ ਆਪ ਜਦ ਆਪ ਗੁਰਦੀ ਸੇਵਾ ਕਰਦੇ ਆ ਗੁਰ ਸ਼ਬਦ ਵਿਚਾਰ ਕਰਦੇ ਆ ਉਹ ਤਾਂ ਹੋਈ ਨਾ ਸਨ ਅਸੀਂ ਲੈ ਕੇ ਆਏ ਸਨ ਬੁੱਧੀ ਦੇ ਕੇ ਪਿੱਛੇ ਰਹੇ ਉਹ ਰੇਹਦੇ ਰੇਹਦੇ ਇਹ ਭੂੜ ਗਵਾਲਿਆ ਫੇੜੀ ਗੱਲ ਵੜ ਲਈ ਗੁਰਮੁਖ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਉਹ ਫਿਰ ਮੂਲ ਕਿਹੜਾ ਗਵਾ ਚੱਲੇ ਜੀ ਬੁੱਧੀ ਲੈ ਕੇ ਆਏ ਸੀ ਉਹ ਬੁੱਧੀਓ ਗੋਲੀ ਠੀਕ ਹੈ ਇਹ ਬੁੱਧੀ 'ਚ ਵਾਅਦਾ ਕਰਨਾ ਤਾਂ ਗੁਰਦੀ ਸੇਵਾ ਕਰਨੀ ਸ਼ਬਦ ਵਿਚਾਰ ਕਰਨੀ ਆ ਗੁਰਬਾਨੀ ਨੂੰ ਵਿਚਾਰਨਾ ਹੈ ਗੁਰਬਾਨੀ ਤੋਂ ਕੁਝ ਪ੍ਰਾਪਤ ਕਰਨਾ ਹੈ ਗੁਰਬਤ ਮੁ르ਤੀ ਵਸਲਾਣੀ ਹੈ ਠੀਕ ਹੈ ਜੀ ਗੁਰ ਗੁਰ ਪੌੜੀ ਹੈ ਗਿਆਨ ਦੀ ਪੌੜੀਆਂ 'ਤੇ ਚੜ ਕੇ ਜਹਾਜ ਚੜ ਜਾਣਾ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨੀ ਸੱਚ ਨਾਨਕਾ ਲੱਗੀ ਤਤ ਲੈ ਨਾਦੇ ਕਹਿੰਦਾ ਜੁੜੀ ਹੋ ਸੋਤਾ ਜਿਹਨੂੰ ਤਤ ਮਿਲ ਗਿਆ ਤਾਤ ਮਿਲ ਗਿਆ ਜੀ ਨੂੰ ਮੱਖਣ ਮਿਲ ਗਿਆ ਨਾ ਹਰਵਾਲੀ ਦੇ ਵਿਚਾਰ ਤੋਂ ਮੱਖਣ ਖਾ ਲਿਆ ਜੀ ਤੇ ਉਹੀ ਲੱਗੀ ਆ ਪੌੜੀ ਤੇ ਚੜ੍ਹੂ ਉਹਦੇ ਹੱਥ ਪੌੜੀ ਆਈ ਆ ਲੱਗੀ ਤੱਕੜਾ ਤੂੰ ਸੱਚਾ ਬੋਲ ਸਕ ਤਾ ਤੂੰ ਸੱਚਾ ਕੋੜ ਵਿੱਚ ਸੱਚ ਦੀ ਇੱਛਾ ਰਜਮੀ ਸਾਚਾ ਤੂੰ ਵੀ ਸਾਚਾ ਦੋਏ ਕੋਣੋ ਚੌਦਰੀ ਕੋੜ ਵਿੱਚ ਵੀ ਸਾਚੀ ਪੋਖਾ ਤੂੰ ਸੱਚਾ ਤੇਰੇ ਕੋਲ ਆਉਣਾ ਚਾਹੁੰਦਾ ਹਾਂ ਜੀ ਮਹਲਾ ਪਹਿਲਾ ਹੇਕੋ ਪਾਦਰ ਹੇਕਦਰ ਗੁਰਪੌੜੀ ਨਿਜ ਥਾਨ ਰੂੜੋ ਠਾਕੁਰ ਨਾਨਕਾ ਸਬ ਸੁਖ ਸਾਚੋ ਨਾਮ ਹੇਕੋ ਪਾਦਰ ਰਾਜਾ ਸਣ ਵਾਲਾ ਇੱਕੋ ਹੀ ਹੈ ਇੱਕੋ ਹੀ ਹੈ ਰਸਤਾ ਕੋਈ ਦੂਆ ਰਸਤਾ ਹੋਰ ਨਹੀਂ ਹੇਕਦਰ ਦਰਬੀ ਇੱਕੋ ਹੀ ਹੈ ਉਹਦਾ ਕਹਿੰਦੇ ਨੇ ਚਾਰ ਦਰਵਾਜੇ ਲਾਤੇ ਆ ਜੀ ਚਰਨ ਬੜ ਲੋ ਰੂਪੇ ਚਾਲ ਵੜ ਚਾਰ ਦਰਵਾਜੇ ਲਾਇਨ ਕਬੜੀਆ ਮਰ ਜਾਂਦੇ ਉਧਾਰੇ ਕੋਈ ਸੀਗਾ ਤੇ ਕੋਈਆਂ ਨਾਲ ਸਰੋਵਰ ਤੋਂ ਜਾਂ ਅੰਦਰਵਾਜੇ ਦਾ ਹਾਵ ਵਾਲਾ ਉਹ ਨੂੰ ਬਣਾਇ ਦੇ ਪਾਣੀ ਤੇ ਪਾਸਾ ਕਾਡੂ ਤੇ ਦਰਵਾਜਾ ਇੱਕੋ ਹੀ ਹੈ ਹਾਵ ਵਾਲ ਵਾਸਤੇ ਜਿਹੜਾ ਦਰਵਾਜਾ ਚਾਰੇ ਪਾਸੇ ਦਾ ਹਾਵ ਹੈ ਦੇਖੋ ਪਾਦਰੇ ਇੱਕ ਦਰ ਕੋਰ ਪੌੜੀ ਦੇਖੋ ਬਗਲ ਦੀ ਪੌੜੀ ਚੜੀ ਜਣ ਦੇਹਾਨ ਤੇ ਬੋਲ ਜਣ ਜਿਹੜੀ ਤੇਰੀ ਕੁਰਸੀ ਖਾਲੀ ਪਈ ਹੈ ਉੱਥੇ ਬੋਲ ਜਣ ਉੱਚੇ ਟੌਨਰ ਕੁਰਸੀ ਹਾਂਜੀ ਰੂੜਾ ਠਾਕੁਰ ਨਾਨਕਾ ਸਬਸੁਖ ਸਾਚੋ ਨਾਮ ਆ ਰੂੜਾ ਦਾਗਰ ਸਾਰੇ ਸੋਗਾਂ ਦਾਤ ਐਸਾ ਦਾਗਰ ਦਵਾਈ ਦਿੰਦਾ ਨੋਦਦੀ ਸਾਰੇ ਸੋਗੋ ਚੁਟ ਉਹਦੇ ਕੋਲ ਨਾਮ ਦੀ ਦਵਾਈਆਂ ਸਾਰੇ ਸੋਗਾਂ ਦੇ ਕੋਈ ਦੁੱਖ ਲੱਗ ਹੀ ਦੀ ਉਹਦਾ ਉਹਦੀ ਮਨੂ ਰੋੜਾ ਉਹਦੀ ਮਨੂ ਇੱਛਾ ਹਾਂਜੀ ਆਪੀ ਨੇ ਆਪ ਸਾਜ ਆਪ ਪਛਾਣਿਆ ਅੰਬਰ ਤਰਤ ਵਿਛੋੜ ਚੰਦੂਆ ਤਾਣਿਆ ਆਪੀ ਨੇ ਆਪ ਸਾਜ ਆਪ ਪਛਾਣ ਆਪੀ ਨੇ ਆਪ ਸਾਜ ਇਹਨੇ ਜੀਵ ਆਤਮਾ ਨੇ ਆਪ ਸਾਜ ਆਪਣਾ ਰੂਪ ਸਾਜਿਆ ਇਹਨੇ ਬੰਸ ਸਾਜਿਆ ਫਿਰ ਇਹਨੇ ਆਪਣਾ ਸਰੀਰ ਬਣਾਇਆ ਫਿਰ ਇਹਨੇ ਇਹਦੇ ਬਾਅਦ ਆਪਣਾ ਆਪ ਚੁਕੜਿਆ ਸਰੀਰ ਦੇ ਵਿੱਚੋਂ ਵੱਡੂ ਪਛਾਣਿਆ ਉਨ ਦੇ ਵਿੱਚੋਂ ਗੁਰੂ ਪਛਾਣਿਆ ਉਨ ਦੇ ਆਪ ਪਹਿਲਾਂ ਪਛਾਣ ਲਿਆ ਇਸ ਦੇਹੀ ਚੋਂ ਬੁਰ ਖੋਜਿਆ ਕਿਸਮਤ ਕੋਈ ਖੋਜੋ ਭਾਈ ਤੇ ਬੰਦ ਵਿੱਚ ਉਹ ਆਪ ਜੋਤ ਸੀ ਇਸਰੀਰ ਜਾਤ ਹੈ ਤੇ ਜੋਤ ਸੀ ਮੰਨ ਰੂਪੀ ਜੋਤ ਜੋਤਮਾ ਜਾਤਾ ਕੰਡ ਜੋਤ ਦੇ ਵਿੱਚੋਂ ਜਾਣੇ ਜੋਤ ਦੇ ਵਿੱਚ ਬੈਠਾ ਸੀ ਆਗੇ ਆਪਣੇ ਆਪ ਨੇ ਕੀਤਾ ਪਹਿਲਾਂ ਆਪਣੇ ਆਪ ਨੂੰ ਦੋਸੋ ਕੀਤਾ ਸਰੀਰ ਦਾ ਜੋੜਿਆ ਫਿਰ ਸਰੀਰ ਨੂੰ ਆਡੇ ਨੂੰ ਆਪਣੇ ਆਪੇ ਰੂਤੀਤਾ ਸਮਝਿਆ ਤਾਂ ਮੇਰੇ ਵਿੱਚੋਂ ਯੂਰੂ ਆਪਣੇ ਵਿੱਚੋਂ ਉਰੂ ਦੇਖ ਲਿਆ ਲੱਗਿਆ ਆਪਣਾ ਆਪੇ ਕਿਸੇ ਦੇ ਦਰਸ਼ ਦੇਖੋ ਕਿਸੇ ਮੂਰਤ ਦੇ ਦਰਸ਼ ਲਈ ਕੀਤਾ ਕਿਸੇ ਗੁਰੂ ਦੇ ਦਰਸ਼ ਲਈ ਕੀਤਾ ਤੇ ਵੀ ਦੇਵਤੇ ਦੇ ਦਰਸ਼ ਲਈ ਕੀਤਾ ਕੁਛ ਨਹੀਂ ਕੀਤਾ ਮਰਵਾਣੀ ਹੋਰੇ ਨਾਲ ਕਹਿੰਦੀਆਂ ਆਪਣਾ ਆਪ ਪਛਾਣਿਆ ਆਪ ਹੀ ਜਿਹੜਾ ਆਪ ਨੇ ਆਪ ਸਾਜ ਹੈ ਇਹ ਕਪੀਰੇ ਆਪ ਸਾਜਾ ਦੋ ਤੋਂ ਹੈ ਅਧਿਕ ਹੋ ਜਾ। ਪੈਰ ਪੌੜਾ ਮਾਰੇ ਆਪ ਲ ਆਪਣੇ ਆਪ ਆਪਣੇ ਆਪ ਤੋਂ ਹੋਇਆ ਸੀ। ਆਪਣੇ ਆਪ ਹੀ ਆਪਣਾ ਆਪੇ ਗੁਰੂ ਦਾ ਉਦੇਸ਼ ਦੇ ਰਿਹਾ ਸਿਰਫ। ਆਪਣੇ ਆਪਣੇ ਆਪ ਨੂੰ ਪਛਾਣਨਾ ਹੈ ਜੀ ਆਪ ਤੋਂ ਆਪ ਨੂੰ ਪਛਾਣਨਾ। ਸਾਬ ਹੋ ਗਿਆ ਕਿ ਬਲਤ ਹੋਰ ਹੈ ਸਾਡੀ ਵੱਖਰੀ ਮਤ ਹੈ। ਕੋਈ ਅਕੀਸੇ ਦੀ ਮਤ ਕੋਈ ਮਤਲਬ ਨਹੀਂ। ठीक है जी, ਧਰਤੀ ਵਿਛੋੜ विछोड ਤਾਣਿਆ ਉੱਪਰ ਨਾਲ ਧਰਤੀ ਵਿਛੋੜਦੀ ਉੱਪਰ ਦੇ ਨਾਲ 합 ਜੜਿਆ ਹੋਇਆ ਧਰਤੀ ਸ਼ਰੀਰਤੀ ਅਡਕਦੀ ਨੂੰ ਆਪ ਪਛਾਨ ਕੇ ਫਿਰ ਧਰਮ ਨਾਲ ਜਾਣੂ ਦੋਲਸ ਦੇ ਹੱਥ ਕੇ ਲਾਵੇ ਦੋਲਸ ਦੇ ਹੀ ਬੀਤ ਆਉਂਦੀ ਮਾਇਆ ਵਿੱਚੋਂ ਦਾਸੀ ਹੋ ਗਿਆ ਉੱਪਰ ਧਰਤੀ ਛੜ ਚੰਦਵਾ ਤਾਣਿਆ ਵਾਯੂ ਤੋਂ ਉੱਪਰ ਉੱਠ ਕੇ ਆਕਾਸ਼ ਨਾਲ ਜੁੜ ਗਿਆ। ਪ੍ਰਮਾ ਗਿਆਨੀ ਕਹਿੰਦੇ ਪ੍ਰਗਾਹ ਜੈਸੇ ਤਾਰ ਉੱਪਰ ਆਕਾਸ਼ ਜਾਂ ਤਾਰ ਉੱਪਰ ਆਕਾਸ਼ ਨਾਲ ਜੁੜ ਗਿਆ ਛੇ ਸਾਰੀ ਸ੍ਰਿਸ਼ਟੀ ਦੇ ਸ਼ਕਤੀ ਤੇ ਜਦੋਂ ਇਹ ਉੱਤਣ ਉੱਪਰ ਉੱਠੇ। ਕੀ ਭਾਵੇਂ ਅੰਬਰ ਨੇ ਧਰਤੀ ਨੂੰ ਵਿਛੋੜਤਾ ਕਿ ਇਹਨੇ ਧਰਤੀ ਨੂੰ ਵਿਛੋੜਤਾ। ਪਰ ਜਿਹੜਾ ਸਰੀਰ ਵਿੱਚ ਅਬਰ ਸੀ ਉਹ ਛੱਡਤਾ। ਸਰੀਰ ਤੇ ਬਾਹਰ ਵਾਲੇ ਅਬਰ ਨਾਲ ਅਟੈਚ ਹੋ ਗਿਆ। ਵਦਲਿਆਂ ਨੂੰ ਬਿਠਾਇਆ ਤੇ ਬਹਲਿਆਂ ਨੂੰ ਬਿਠਾਇਆ ਸਰਬ ਵਿਆਪੀ ਹੋ ਗਿਆ ਨਾ ਪ੍ਰਭ ਗਿਆਨੀ ਦਾ ਉਹ ਪ੍ਰਕਾਸ਼ ਜਿਵੇਂ ਤਾਰੂ ਪਰ ਆਕਾਸ ਤਾਰੂ ਪਰ ਆਕਾਸ ਇਤਨਾ ਜਿਹਾ ਪ੍ਰਕਾਸ਼ ਹੋ ਗਿਆ ਤਾਂ ਅੰਦਰ ਅੰਦਰ ਉਹ ਪਰਦਾ ਛੱਡੇ ਦਿੱਤਾ ਨਾ ਸ਼ਰੀਰ ਦੇ ਅੰਦਰ ਕਿੰਨਾ ਖਬਰ ਜਿੱਥੇ ਮਰਜੀ ਫਰੀ ਆ ਬਈ ਜੁੜਿਆ ਹੋਇਆ ਤਾਂ ਹੈ ਹੀ ਇਹ ਸ਼ਰੀਰ ਦਾ ਇਹ ਚੰਬਰ ਹੈ ਤੇ ਚੰਦੂਆ ਤਾਣੀਆਂ ਦਾ ਕੀ ਭਾਵ ਹੈ ਤਾਂ ਹੀ ਆਪਾਂ ਚੰਦੂਆ ਤਾਣਦੇ ਹਾਂ ਪੁੱਤੀ ਸਾਹਿਬ ਦੇ ਉੱਪਰ ਉੱਪਰ ਹੈ ਜਿਹੜਾ ਜਦੋਈ ਦੀ ਦਾ ਪਰ ਉੱਪਰ ਜਿਹੜਾ ਆਪਣਾ ਅਕਾਸ਼ ਐ ਇੱਥੋਂ ਬੈਠੇ ਉਹ ਜਦੋਈ ਦੀ ਦਾ ਜੋ ਅੱਛਾ ਧਰਤੀ ਵਿਛੋੜ ਹੈ ਜੀ ਅੰਬਰ ਨੇ ਧਰਤੀ ਨੂੰ ਵਿਛੋੜਤਾ ਹੈ ਜੀ ਅੰਬਰ ਧਰਤੀ ਦੇ ਵਿੱਚ ਵੀ ਆ ਤਾਂ ਛੱਡੀ ਹੋਈ ਹੈ ਧਰਤੀ ਸਾਰੇ ਕਿਹੜਾ ਬੱਚੇ ਉਹ ਲੁਕਿਆ ਹੈ ਵੀ ਪਹਿਲਾਂ ਧਰਤੀ ਦਾ ਭਾਵ ਹੈ ਵੀ ਸ਼੍ਰੀ ਨਾਲ ਜੁੜਿਆ ਹੋਇਆ ਸੀ ਇਹ ਹੈ ਜੋ ਸਮਾਨੀਆ ਜਦੋਂ ਉਹਨੇ ਇਹ ਆਕਾਸ਼ ਵਿੱਚ ਗਗਨ ਵਿੱਚ ਥੰਮੀ ਕੋਈ ਨਹੀਂ ਪੱਤੇ ਜਿਹੜੇ ਟਿਕੜ ਲੂਨ ਪਹਿਲਾਂ ਸਰੀਰ ਦਾ ਥੰਮਾ ਸੀ ਨਾ ਇਹਦੇ ਆਖਲੇ ਟਿਕਦਰ ਦੀ ਥਿਰਗੁੜੀ ਉਹ ਬਿਨ ਥੰਮਾ ਗਗਨ ਨਾ ਹੈ ਰਹੂਗਾ ਗਗਨ ਦੇ ਵਿੱਚ ਥੰਮ ਕੋਈ ਨਹੀਂ ਲੋੜ ਪਣੀ ਕਿਉਂ ਸ਼ਬਦ ਨੇ ਸੰਸਾਰ ਨੇ ਸ਼ਬਦ ਹੈਗਾ ਸ਼ਬਦ ਨਾਲ ਜੁੜਿਆ ਰਹੂਗਾ ਉਹ ਜਿਸਾਲ ਨੇ ਸ਼ਬਦ ਹੈ ਮਾਇਆ ਤੋਂ ਰਹਿਦੀ ਜਿਹੜਾ ਸ਼ਬਦ ਹੈ ਉਹਦੇ ਨਾਲ ਜੁੜ ਹੁਣ ਉਸ ਸਰਪਿਆਪੀ ਆ ਉਹਦੇ ਨਾਲ ਜੁੜ ਕੇ ਸਰਪਿਆਪੀ ਰਹੂਗਾ ਉਸ ਛੱਬ ਦੇ ਜਹਾਜ਼ ਆ ਨਾ ਜਹਾਜ਼ ਵਿੱਚ ਨਾਮ ਜਹਾਜ਼ ਹੈ ਨਾਮ ਨੇ ਜਹਾਜ਼ ਚੈਰ ਤੇ ਹੜੂ ਤਰਤੀ ਤੈਦੀ ਚੈਰ ਕਰਦਾ ਨਾ ਤਾਂ ਉੱਤੇ ਹੀ ਰਲਵੇ ਠੀਕ ਹੈ ਜੀ ਸੂਰਜ ਚੰਦ ਪਾਏ ਜੋਤੀ ਸਮਾਨਿਆ ਸੂਰਜ ਚੰਦ ਪਾਏ ਜੋ ਸਮੋਣਿਆ ਸੂਰਜ ਬਾਹਲੇ ਵੀ ਸੂਰਚੰਦ ਵੀ ਤੇਲੇ ਵੀ ਚੰਦਰ ਸੂਰਜ ਜੇ ਤਾਂ ਸੂਰਜ ਬਦਲ ਚੰਦਰਮ ਜੋਤਸ ਬੋਲੇ ਜੋ ਦੋਹਰੇ ਵਿੱਚ ਹੀ ਆ ਹਾਂਜੀ ਕੀਏ ਰਾਤ ਦਿਨੰਤ ਜੋਜ ਵਿਡਾਣਿਆ ਤੀਰਥ ਤਰਮ ਵਿਚਾਰ ਨਾਵਣ ਪੁਰ ਬਾਣਿਆ ਕੀਏ ਰਾਤ ਦਿਨਤ ਜੋਜ ਵਿਡਾਣਿਆ ਦਿਨ ਰਾਤ ਬਣਾਤੇ ਬਣੇ ਚੋਜੀ ਦੇ ਜੋਜ ਕਰਕੇ ਦਿਨ ਰਾਤ ਬਣਾਉ ਲਈ ਤੇ ਦਲੂ ਲੋਕਾਂ ਨੇ ਕੰਮ ਕਰਨ ਸੀ ਰਾਤ ਨੂੰ ਰਾਤ ਵੀ ਤਾਂ ਕਰ ਸੀ ਠੀਕ ਹੈ ਇਹਨਾਂ ਦੇ ਬਾਹਰਲੀ ਦੁਨੀਆ ਦੀ ਗੱਲ ਚੱਲ ਰਹੀ ਹੈ ਜੀ ਚੋ ਸੂਰਜ ਚੰਦ ਉਪਾਏ ਜੋਤ ਸਮਾਣ ਇਹਨਾਂ ਨੇ ਵੀ ਤਾਂ ਜਿੱਤੇ ਆਰਾਮ ਕਰਨ ਲਈ ਹੁੰਦਾ ਇਹ ਜੀਵਾਂ ਬਣਾਈ ਹੈ ਤ੍ਰਿਸ਼ਟੀ ਕਰਦਾ ਸ੍ਰਿਸ਼ਟੀ ਦੀ ਹੋਈ ਹੈ ਕਿ ਚੰਨ ਸੂਰਜ ਵੀ ਤਾਂ ਆਰਾਮ ਕਰਦਾ ਹੈ ਸਾਡੇ ਆਲੇ ਤੀਰ ਤੇ ਵਿਚਾਰ ਨਾਵਣ ਪੁਰ ਫਿਰ ਤੀਰ ਬਣਾਏ ਧਰਮ ਬਣਾਏ ਵਿਚਾਰ ਕੇ ਅਪਰਵ ਬਣਾਏ ਲੋੜ ਦੇ ਇਹ ਬਣਾਤੇ ਇਹ ਪਹਿਲੀ ਕਲਾਸ ਦੀ ਇੱਥੇ ਸ਼ੁਰੂ ਕੀਤੀ ਹੈ ਪੜਾਈ ਇਹ ਪਹਿਲਾਂ ਪੜਾਈ ਸ਼ੁਰੂ ਹੋਈ ਹੈ ਇੱਥੇ ਵੀ ਮਾਲਾ ਨਹੀਂ ਸੀ ਕੋਈ ਗਿਆਨ ਨੂੰ ਜਾਂਦੇ ਜਦ ਕਹਿੰਦੇ ਨੇ ਇੱਥੋਂ ਕਾਨੂੰਨਾਂ ਜਾਓ ਫਿਰ ਮਾੜੀ ਗੱਲ ਪ੍ਰਾਇਮਰੀ ਸਕੂਲ ਨਹੀਂ ਬੁਰੇ ਜੋ ਕਹਿੰਦੇ ਵੀ ਥੱਲੇ ਦੀ ਪੜਾਈ ਸਹੀ ਕਰਾਉਣ ਅੱਗੇ ਦੀ ਪੜਾਈ ਬੰਦ ਕਰ ਦਿੰਦੇ ਨੇ ਹੋਰੇ ਪੜਾਈ ਪਰ ਉਲੜਾਂ ਜਾਂਦੇ ਨੇ ਹਾਂਜੀ ਤੁਧ ਸਰ ਆਕ ਬਖਾਣਿਆ ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ ਤੁੱਤ ਸਾਰਿਆ ਵਰਨਾ ਕੋਏ ਕੀ ਆਖ ਬਖਾਣਿਆ ਕਿ ਆਖ ਕੇ ਸੁਣਾ ਮੈਂ ਤੇਰੇ ਬਰਾਬਰ ਕੋਈ ਨਹੀਂ ਤੁੱਤ ਸਾਰਿਆ ਵਰਨਾ ਕੋਏ ਕੀ ਆਖ ਬਖੜੇ ਹਬੇ ਤਖਤ ਦੇ ਦਰਵਾਜ਼ਾ ਔਰ ਆਵਲ ਜਾਣਿਆ ਉਹ ਸਾਰੇ ਤਖਤਾਂ ਦੇ ਪੇਤਾ ਦਰਵਾਜ਼ਾ ਕਰਦੇ ਇਹਦੇ ਬਠੇਰੇ ਇੱਥੇ ਰਾਜੇ ਤਖਤ ਬਲੂ ਹੀ ਖੜੇ ਨੇ ਪਰ ਸਾਰੇ ਜੰਬਲਬਲ ਚੇ ਨੇ ਜਿਹੜੇ ਡਾਕਟਰ ਹੋਰ ਤੇਰੇ ਤਖਤ ਤੇ ਬਿਨਾ ਬਾਕੀ ਜਿਹੜੇ ਹੋਰ ਤਖਤ ਬਲੂ ਬੈਠੇ ਨੇ ਰਾਜੇ ਬਲੂ ਬੈਠੇ ਨੇ ਇਹ ਸਭ ਜੰਬਲਬਲ ਚੇ ਨੇ ਆਵਾਗੌਂ ਚ ਪਏ ਹੋਏ ਤੇਰੇ ਵਰਗਾ ਕੋਈ ਰਾਜਾ ਨੀ ਜੀ ਦਾ ਤਖਤ ਰਹਿਣ ਵਾਲਾ ਹੈ ਬਲੋਲ ਹੈ ਅਚਲ ਹੈ ਸੱਚਾ ਤਖਤ ਹੈ ਹਮੇਸ਼ਾ ਰਹਿਣ ਵਾਲਾ ਸਦਾ ਸਿਰ ਰਹਿਣ ਵਾਲਾ ਤੂੰ ਦਸਰਾਵਰਨਾ ਕੋਈ ਕਿ ਹੁਕਮ ਨੂੰ ਕਿਹਾ ਜੀ ਹਾਕਮ ਨੂੰ ਅੱਛਾ ਜੀ ਕੋਈ ਤਾਂ ਰਹਿਦਾ ਨਹੀਂ ਵੀ ਰਹਿਦਾ ਹੋਂਦਾ ਕੀ ਹੈ ਠੀਕ ਹੈ ਸੱਚੇ ਤਖਤ ਨਿਵਾਸ ਹੋ ਰਾਵਣ ਜਾਣਿਆ ਤਖਤ ਤੇ ਉੱਤੇ ਹਰਦੁਸਨ ਨਿਵਾਸ ਹੁੰਦਾ ਨਾ ਅੱਛਾ ਜੀ ਜਿਹੜੇ ਹਾਕਮ ਨਾਲ ਜੁੜ ਗਏ ਉਹਨਾਂ ਦਾ ਆਵਣ ਜਾਣ ਚੁੱਕ ਜੇਗਾ ਬਾਕੀ ਆਪਣੇ ਆਵਣ ਜਾਣ ਦੇ ਚੱਕਰ ਚ ਪਏ ਰਹਿਣਗੇ ਹਾਂ ਜੀ ਜੁੜ ਗਏ ਨਹੀਂ ਆਵਣ ਜਾਣ ਦੇ ਹਾਕਮ ਨਾਲ ਜੁੜ ਗਏ ਹਾਕਮ ਨਾਲ ਬਣ ਕੇ ਉਹ ਵੀ ਅਗਵੇ ਬਣ ਕੇ ਬਰਾਬਰ ਹੋ ਗਏ ਸਾਰੇ ਭਾਈ ਠੀਕ ਹੈ ਜੀ ਤੇ ਆ ਜਿਹੜੇ ਵਿਚ ਆਏ ਸੀਗੇ ਸੂਰਜ ਚੰਦ ਤੋਂ ਲੈ ਕੇ ਇਹ ਸਾਰੇ ਫਿਰ ਰਾਤ ਦਿਨੰਤ ਚੋਜ ਵਿਡਾਣੀਆਂ ਇਹ ਬਾਹਲੇ ਉਹਦੇ ਨਾਲੇ ਲੱਗਦੇ ਆ ਜੀ तीर ਧਰਮ ਵਿਚਾਰ ਆਲੇ ਨਾਲ ਵੀ ਲੱਗਦੇ ਨੇ ਅੰਦਰਲੇ ਨਾਲ ਵੀ ਲੱਗਦੇ ਨੇ ਸੂਰਜ ਜਾਂਦਾ ਸੀ ਵਾਦੂ ਚੰਦ ਕਹਿੰਦੇ ਆ ਚਿੰਤ ਨੂੰ ਸੋਚ ਕੱਢ ਚੰਦ ਕੋਲ ਆਪਣੀ ਰੋਸ਼ਨੀ ਨਹੀਂ ਹੁੰਦੀ ਸੂਰਜ ਦੇ ਦਿੱਤੀ ਹੋਈ ਰੋਸ਼ਨੀ ਹੁੰਦੀ ਹੈ ਪਰ ਜੇ ਚੰਦ ਸੂਰਜ ਦੋ ਬਾਹਰ ਨਾਲ ਉਹਦੇ ਦਾ ਰੈਸਟ ਦੁਨੀਆ ਕਬਲ ਕਰਦੀ ਪਬਲਿਕ ਬਾਹਰ ਵੀ ਬਣਾਏ ਨੇ ਅੰਦਰ ਵੀ ਬਣਾਏ ਠੀਕ ਹੈ ਜੀ ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ